ਮੁਗੰਨੀ ਸਗਲ ਕੀ ਰੀਨਾ ਵਰਮ ਕਿਆਦੀ ਸਗਲ ਕੀ ਰੀਨਾ ਐਸੀ ਢੂੜ ਐ ਐਸਾ ਸੁਰਮਾ ਵਰਮ ਕਿਆਦੀ ਕੋ ਰੀਦ ਜਿਹੜਾ ਹਰੇਕ ਦੀ ਅੱਖ ਦੀ ਤਰ੍ਹਾਂ ਤੇਜ਼ ਕਰ ਦੋ ਮੰਨਾਂ ਨੂੰ ਵੀ ਦਿਖਾਣ ਲੱਗੀਆਂ ਤੇ ਪਉਂਦੇ ਰਹਿਣ ਐਸਾ ਉਹ ਤਾਂ ਕੁਮਬੀਰ ਹੋਵੇ ਨਾ ਅੱਖ 'ਚੋਂ ਬਿਲਕੁਲ ਲਾਈਟ ਨਾ ਹੋਵੇ ਸ਼ਾਮ ਨੂੰ ਔਰ ਆਖਿ ਚ ਨਿਯਮ ਆਂ ਪੱਟ ਪਾਵੇ ਦੋ ਵੇਲੇ ਸੜਾਈ ਫਿਰ ਹਰਨਾ ਕਰੀਓ ਨਗਾ ਹੋ ਜੂਗੀ ਉਹਨੇ ਹੋ ਜੂਗੀ ਜੇ ਤੀ ਚਾਹੀਦੀ ਹੈ ਜੇ ਤੀ ਹੁਦੀ ਹੈ ਨਿਰਾਕਾਰ ਜਿਹਨੂੰ ਦੇਖ ਰੂ ਜਿਹਨੂੰ ਸਾਰੇ ਆਪਾਂ ਕਹਿੰਦੇ ਨਾ ਦੇਖ ਲੈਂਦਾ ਉਹਨੇ ਨਰਾਕਾਰ ਦੇਖਣਾ ਹੈ ਤਾਰੇ ਦੇਖਣਾ ਨਹੀਂ ਹਾਂਜੀ ਆਤਮ ਰਸ ਬ੍ਰह्म ਗਿਆਨੀ ਚੀਨਦਾ ਆਤਮ ਰਸ ਬ੍ਰह्म ਗਿਆਨੀ ਚੀਨੋ ਕਿਉਂਕਿ ਆਤਮ ਰਸ ਹੈ ਉਹ ਬਣੂ ਜਾਂਦੀ ਨਾ ਉਹਦਾ ਟੇਸਟ ਕੀਤਾ ਹੁੰਦਾ ਹੋ ਗਿਆ ਹੁੰਦਾ ਉਹਨੇ ਆਤਮਰਾਹ ਸੇ ਦੇਣਾ ਉਹਨੇ ਕਿਹੜਾ ਉਸੇ ਮਰੀਆਤ ਪਰਦਾ ਹੀ ਹੋਰ ਕੀ ਆ ਆਤਮਰਾਹ ਨਾਲ ਅੱਖ ਤੋਂ ਜੱਦੀਏ ਰੋਜ ਉਹਦੀ ਇਹਦੇ ਹੀ ਟਰੋ ਫਾਦਣਾ ਹੋਰ ਤਾਂ ਕੋਈ ਨਹੀਂ ਆ ਉਹ ਹੈ ਹੋਇਆ ਜਿੱਥੋਂ ਮਿਲਦਾ ਦਵਾਈ ਖੋਜਦੇ ਨੇ ਲੋਕ ਉਹ ਫਰੀ ਮਿਲਦੀ ਆ ਉਹ ਫਰੀ ਦੇਈ ਜਾਂਦਾ ਉਦਰੀ ਆਕਰ ਲੈ ਪਾਣੀ ਬੋਲ ਲੈ ਕਿ ਹਾਂ ਨਾ ਦਰਿਆ ਵੀ ਤੇ ਪਾਣੀ ਨਾਲੇ ਕਿਉਂ ਨਾ ਬੋਲ ਉਹਦਾ ਕੋਈ ਕਹਾਣੀ ਤੇ ਆਣਾ ਨਹੀਂ ਤੇ ਤੈਨੂੰ ਪੀਲੂ ਪੀਲੂ ਨੀ ਹੁੰਦਾ ਲੱਛਰੇ ਜਾਨਦੂੜੀ ਮੁੜ ਕੇ ਹਾਂਜੀ ਬ੍ਰਹਮ ਗਿਆਨੀ ਕੀ ਸਭ ਪਰ ਹਾਂ ਬ੍ਰਹਮ ਗਿਆਨੀ ਕੀ ਸਭ ਪਰ ਮਾਇਆ ਉਹ ਸਭ ਪਰ ਦੇਖੋ ਅਸੀਂ ਜੇ ਦਾ ਕਰਾਂਗੇ ਵਿਅਕਤੀ ਬਣ ਗਿਆ ਜੀ ਜਿਹੜਾ ਵਿਅਕਤੀ ਬਣ ਗਿਆ ਉਹਦਾ ਸਭ ਦਾ ਲਾਭ ਸਰ ਭਾਗਮੀ ਆਜੀ ਹੋ ਜੇ ਪਰਮੇਸ਼ਰ ਬਾਹੋਂ ਯਾਨੀ ਆਪਰ ਮੈਸ ਲਵਾ ਦੇ ਫੇਰ 84 ਲੱਖ ਜੂਨ ਆ ਸਾਰਾ ਜੋ ਸੰਦੂ ਫੁਰ ਮਿਆ ਸਭ ਫੇਰ ਉਹ ਸਭ ਸ੍ਰਿਸ਼ਟੀ ਦੇ ਗਿਆ ਉਹ ਸੇਸ ਕਾ ਕਰਤਾ ਉਹ ਮੇਰਾ ਸਿਸ ਕਾ ਕਰਤਾ ਨਵਰੁਖ ਨਿਆਦੀ ਸਿਸ ਪਰੇ ਮਾਇਆ ਹੈ ਬਰੋ ਜਿੰਨਾ ਜਰ ਉਹਦੀ ਮਿਹਰ ਆ ਉਹ ਹਜ ਤਰਤੀਆਂ ਨੇ ਭਾਗੇ ਉਹਦੀ ਮਾਇਆ ਨਾਲੇ ਕਾ ਹੈ ਮਾਇਆ ਨਾਲੇ ਪਾਣੀ ਤੇ ਤਰਤੀ ਹੈ ਮਾਇਆ ਨਾਲੇ ਕਾ ਖੜੀ ਹੈ ਨਾ ਕੋ ਰਸਾ ਨਾ ਕੋ ਜਿਮਿਆ ਨਾਲ ਕੋ ਖੁੰਟੀ ਗੱਡੀ ਹੈ ਨਾਲ ਕੋ ਜਾਂਦੀ ਉਹ ਵਿਚਾਲੇ ਮਾਇਆ ਔਰ ਦਇਆ ਦੇ ਵਿੱਚ ਕਿੱਦਾਂ ਗੁਰਤੀ ਕੀ ਮਾਇਆ ਔਰ ਦਇਆ ਜੇ ਆਹ ਤਾਂ ਗੱਲੇ ਦੀ ਕੋਈ ਨਹੀਂ ਮਾਇਆ ਖੱਲੀ ਮਾਇਆ ਦੀ ਗੱਲ ਹੈ ਨਹੀਂ ਮਾਇਆ ਮਾਇਆ ਦਾ ਦੋਜੀ ਮਾਇਆ ਦਾ ਦੋਜੀ ਚਾਹ ਹੈ ਦੋਜੀ ਚਾਹ ਨਹੀਂ ਐਤਕੱਲੇ ਮਾਇਆ ਦੀ ਲੋੜ ਹੈ ਸਭ ਤੋਂ ਦਇਆ ਦਾ ਹੋਇਓ ਗਿਆ ਸਾਹਿਦ ਹਿੱਟਾ ਹੋਇਆ ਫਾਂਪੇ ਨੂੰ ਮਾਇਆ ਤੇ ਵਣਾਰਾਈ ਜੀ ਸਕਦਾ ਹੈ ਮਾਇਆ ਦੇ ਬਨਾਸਰ ਬਿਯੂਦਨ ਦੇ ਸਕਦਾ ਸਭ ਕੁਝ ਜੋ ਦੇਤਾ ਸਰਦੂ ਹਾਂ ਨਹੀਂ ਮੇਰਾ ਬਦਲ ਕਿਰਪਾ ਹੈ ਜਿਹੜਾ ਆਤਮਾ ਜੁੜੀ ਹੋਈ ਹੈ ਸਰੀਰ ਨਾਲ ਸਾਹ ਆਉਂਦਾ ਜਿਹੜਾ ਸਾਹ ਆਉਂਦਾ ਉਹਦੀ ਮਾਇਆ ਤਾਂ ਸਾਹ ਲੈ ਸਕਦਾ ਜਾਂ ਉਹ ਮਾਇਆ ਹਟਾ ਦਿੰਦਾ ਸਾਹ ਇਹ ਲੈ ਨਹੀਂ ਸਕਦਾ ਤਾਂ ਕੋਈ ਸ਼ਕਤੀ ਨਹੀਂ ਮਾਇਆ ਉਦੀ ਛੱਤੀ ਹੈ ਤਾਂ ਗੈਰ ਜਨਤਾ ਕੇ ਵਸ ਕਿਸ ਨੇ ਇਹ ਸਭ ਕੁਝ ਮਾਇਆ ਹੈ ਅੱਜ ਕੋਈ ਨਹੀਂ ਆ ਸਭ ਚਲੇ ਖਲਾਇ ਉਦੀ ਮਾਇਆ ਨਾ ਚਲਦੇ ਮਾਇਆ ਰਸੀ ਦੇ ਝੂਠ ਖਿਡਾ ਸਭ ਕੁਝ ਭਸਾਂ ਬਿਰਟ ਚ ਕੱਖ ਦੇ ਖੁਰਨਾ ਸਾਡੀ ਸ੍ਰਿਸ਼ਟੀ ਨੂੰ ਫਤਬ ਬਸਾ ਦੇ ਨੇਤਰ ਕੋ ਫੜ ਫੜ ਜਾ ਕਰਨੇ ਤੇਰ ਕੋ 타ਗਾ ਮੰਤਰ ਨਾ ਕਰਨੇ ਹੋ ਇੱਥੇ ਜੋ ਇਹ ਗੁਰੂੰਦਰ ਨੇ ਇਹ ਨੂੰ ਦੇ ਜਗ ਰਹਿਣੇ ਦੱਸੇ ਕਿਹੜੇ ਜਿਵੇਂ ਸਿੰਘ ਸਿੰਘ ਸਾਹਿਬ ਦੀ ਇੱਕੋ ਹੀ ਹੈ ਹੁਣ ਇਹ ਦੋ ਨਹੀਂ ਬਣ ਕੇ ਚੱਲਣਾ ਹੁਣ ਗੱਲ ਹੈ ਦੀ ਗੱਲ ਨਹੀਂ ਹੈ ਇੱਕ ਹੋਇਆ ਹੋਇਆ ਬਿਆਹ ਨਹੀਂ ਪੂਰਨ ਬਰਮ ਨਹੀਂ ਹੁੰਦਾ। ਟਿਪਕ ਸਟਿਊਡੋ। ਰੋਜ਼ ਪੂਰਨ ਬਰਮ ਨਹੀਂ ਹੁੰਦਾ। ਉਹੀ ਹੋ ਸੇ ਦੀ ਗੱਲ ਚੱਲਦੀ ਅੜਚੀ ਨਹੀਂ ਚੱਲਦੀ। ਧਾਰ ਵਾਲੇ ਦੇ ਨਹੀਂ ਕੱਲ ਚੱਲਦੀ ਹੁਣ। ਦੋ ਪਦਾਰਥ ਤਾਂ ਉਹ ਕੋ ਹੈਗੇ ਨਹੀਂ। ਜਾਂ ਦੋ ਪਦਾਰਥ ਆ ਗਏ ਜਦ ਇਹ ਹੋ ਗਿਆ। ਜਾਂ ਉਹ ਤਾਂ ਦੋ ਪਦਾਰਥ ਆਏ ਨੇ। ਫਿਰ ਕੁਟੇ ਜਦ ਛੱਡਿਆ ਆਇਆ। ਦੋ ਪਦਾਰਥ ਸਾਰੇ ਛੱਡ ਦਿੰਦਾ। ਤਾਂ ਇਹਦਾ ਦੋ ਦਰ ਖੁੱਲੇ ਤਾਂ ਤੁਸੀਂ ਜਾ ਕੇ ਹੁਕਮ ਛੋੜਦੇ ਹੋ ਨੂੰ ਕੋਈ ਜੀ ਉਗਣਾ ਤਾਂ ਇੱਥੇ ਹੀ ਆ ਤੁਰਕੀ ਦਾਜ ਇੱਕੋ ਜੀ ਹੋ ਸਕਦਾ ਤੁਰਕੀ ਛੱਡੇ ਵੀ ਦੋ ਜਦੋਂ ਦਸ ਪਾਸ ਜਾ ਕੇ ਨਾ ਤਾਂ ਇਹ ਇੱਕ ਗਰੂਪ ਹੋ ਗਏ ਹੋ ਤਾਂ ਇਹ ਇੱਕ ਗਰੂਪ ਹੋ ਗਿਆ ਉਹ ਵੀ ਇਹ ਦੋ ਬਜ਼ਾਰ ਫੇਜੀ ਤੇ ਟੁੜੀ ਰਹਿਤੀ ਹੋਈ ਸੀ ਸਭ ਗਿਆਨੀ ਕੀ ਸਭ ਉੱਪਰ ਮਾਇਆ ਮਾਇਆ ਨਹੀਂ ਕਿਰਪਾ ਦ੍ਰਿਸ਼ਟੀ ਵੀ ਕਹਿੰਦੇ ਨੇ ਠੀਕ ਮਾਇਆ ਹਾਂ ਤਾਂ ਬਰਤ ਜਾਈ ਕੋਈ ਕੋਈ ਗੱਲ ਹੈ ਮੈਨੂੰ ਉਹ ਦੱਸੋ ਦੇਖੋ ਸੂਰਜ ਵੀ ਖੜਾ ਹੈ ਧਰਤੀ ਵੀ ਖੜੀ ਹੈ ਇਹਨਾਂ ਦਾ ਕਸ਼ਿਸ਼ਵੀ ਹੈਗੀ ਹੈ ਔਰ ਇੱਕ ਦੂਰੇ ਨਾਲ ਅਟੈਚ ਵੀ ਨਹੀਂ ਵਿੱਚੋਂ ਇਹ ਵਿਚਾਰੇ ਜੋ ਸਾਰੀ ਫੋਰਸ ਹੈ ਕਿ ਕੀ ਹੈ ਇਹਨੂੰ ਉਸਦੀ ਮਾਇਆ ਕਹਿੰਦੇ। ਬਾਕਾਇਦੀ ਸੁਭਤਾ ਕੋਈ ਹੈ ਜੀ। ਜੇ ਉਹਦੀ ਆਪਣੀ ਮਾਇਆ ਹੀ ਹੋ ਹੋ ਰਜ਼ੀ ਨੂੰ ਕੀ ਕੀਏ। ਕੋਈ ਨਾ ਹੁਦਾ ਰੱਖਣਾ ਹੀ ਜੀ। ਇਹ ਸਰੀਰ ਪੰਜ ਤਤਾਂ ਦਾ ਹੈ। ਇਹ ਪੰਜੇ ਤਤ ਜੋਦੀ ਭਾਇਆ ਦੇ ਹਿਸਾਬ ਨਾਲ ਸੂਰਜ ਰੋਜ਼ ਥੋੜਾ ਥੋੜਾ ਥੋੜਾ ਥੋੜਾ ਖਤਮ ਹੁੰਦਾ ਹੈ ਪਰ ਉਡੀ ਕੇ ਸਾਨੂੰ ਹੀਟ ਉਹਦੀ ਆ ਲਾਈਟ ਆਉਦੀ ਹੈ ਜਿੱਦੀ ਲੋੜ ਹੈ ਜੇ ਇੱਕ ਟਮ ਸਾਰਾ ਹੀ ਫੁੱਟ ਜਵੇ ਹਾਲਕੀ ਉਹ ਆ ਜੀ ਜੋਦੀ ਮਾਇਆ ਦਾ ਕੰਟਰੋਲ ਹੈ ਉਹਦਾ ਉਹਨਾਂ ਨੂੰ ਕਰਦੇ ਜਿਆਦਾ ਗਰਮ ਨਹੀਂ ਨਾ ਸਾਡੇ ਪਲਾਂਟ ਲਾਏ ਹੋਏ ਨੇ ਥੋੜੀ ਕੰਟਰੋਲ ਨਾ ਕੋਈ ਹੁੰਦਾ ਨਾ ਵੀ ਜਿਆਦਾ ਨਾ ਬਦ ਘੱਟ ਤੇ ਖੜੋ ਉਹ ਕੰਟਰੋਲ ਕਿੱਥੇ ਆਉਦਾ ਐਡੇ بڑے ਸੂਰਜ ਹੁੰਦੇ ਇੱਕ ਸੂਰਜ ਆ ਜੇ ਸੂਰਜ ਨੇ ਉਹ ਕਹਿੰਦੇ ਉਹ ਕਿੱਥੇ ਆਖਰ ਸੈਦਾਨ ਵਿੱਚ ਖੋਜ ਕਰਦੇ ਨੇ ਬੰਦੇ ਵੀ ਸਾਰੇ ਦੇਖਦੇ ਨੇ ਉਹ ਸ਼ਕਤੀ ਦੀ ਗੱਲ ਹੋ ਰਹੀ ਹੈ ਉਸੇ ਕਰਤੀ ਦੀ ਗੱਲ ਹੋਦੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਜੋ ਬੁਰਾ ਮਾਇਆ ਤੇ ਕਿਰਪਾ ਕੀਤੀ ਹੋਈ ਹੈ ਕੋਈ ਗਲਤ ਕੀਜ ਨਹੀਂ ਬਣਾਈ ਅਸੀਂ ਬਸੇ ਛੇੜਖਾਦੀ ਗਲ ਕਰ ਸਕਦੇ ਆ ਕਰਦੇ ਆ ਸ਼ੈਦਾਨ ਹੈ ਮਨ ਸਾਡਾ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕੁਝ ਬੁਰਾ ਨਾ ਪਿਆ ਗੱਲ ਕਹਿਣ ਇਸ ਕਰਕੇ ਉਹਦੇ ਬੁਰਾ ਹੋ ਕੇ ਵੀ ਜਾਊਗਾ ਬੁਰਾ ਉਹਦਾ ਕੁਛ ਕਿਵੇਂ ਹੋ ਗਿਆ ਸਾਰਿਆਂ ਤੇ ਮਾਇਆ ਤੁਸੀਂ ਕਹਿੰਦੇ ਹੋ ਸਾਰੇ ਧਰਮੰਤੇ ਨੇ ਕਿ ਉਹਦੀ ਸਾਰਿਆਂ ਤੇ ਸਾਰਿਆਂ ਤੇ ਕਿਰਪਾ ਰਹਿੰਦੀ ਹੈ ਸੰਤ ਵੀ ਸਾਰਿਆਂ ਤੇ ਉਹੋ ਜਿਹਾ ਹੀ ਸੁਭਾਅ ਉਹ ਵੀ ਮੰਨਦੇ ਫਿਰ ਉਹਦਾ ਬੁਰਾ ਕਿਵੇਂ ਹੋ ਗਿਆ ਉਹ ਤਾਂ ਜਿਵੇਂ ਕਹਿਣਾ ਵਿਆਹ ਨੇ ਅਰਸ ਕਰਤਾ ਇਹੋ ਨੇ ਹੋ ਕਰਤਾ ਸ਼ਹਿ ਕਹਿਣਾ ਕਰਨ ਲੱਗ ਜਾਂਦੇ ਘੜੀ ਤੇ ਕਿਉਂ ਮਤਲਬ ਕਰਦੇ ਹੋ ਤੁਸੀਂ ਇਹ ਗੱਲ ਠੀਕ ਹੈ ਸਾਨੂੰ ਨਹੀਂ ਸਮਝ ਵੀ ਕਿਉਂ ਹੋਇਆ ਹੈ ਹੈ ਉਹਦੀ ਮਾਇਆ ਹੀ ਸਭ ਨੂੰ ਰੁੱਤ ਦੇਖੋ ਮੌਸਮ ਬਦਲਦੇ ਨੇ ਕਰਮੀ ਆ ਗਈ ਆ ਛੋਟੇ ਮੱਖੀ ਇਹਨਾਂ ਮਛਰਾਂ ਦੇ ਛੋਟੇ ਇਹਨਾਂ ਜਿਹੜੇ ਦੁਖੀ ਆ ਫਰ ਅਸੀਂ ਖੁਸ਼ੀ ਹੋ ਜਾਣਾ ਉਹਨਾਂ ਬੁਰੀ ਹੋ ਮੌਸਮ ਕਿ ਸਕੁਰਾ ਹੱਥ ਮੜਨੇ ਆ ਕਿਸੇ ਵਾਸਤੇ ਠੀਕ ਹੈ ਕਿਸੇ ਵਾਸਤੇ ਗਲਤ ਹੈ ਕੀ ਕਰਦਾ ਕੀ ਕਰਦਾ ਉਹ ਨੂੰ ਜਿਆਦਾ ਪਤਾ ਕੁਛ ਨਹੀਂ ਕਹ ਸਕਦਾ ਕਿ ਮੱਛਰ ਅੰਦੀ ਦੇਰ ਵਾਸਤੇ ਚਾਹੀਦਾ ਸੀ ਉਹ ਕੀ ਕਰਦਾ ਸੀ ਪੂਰਾ ਇਹ ਵੀ ਸਾਨੂੰ ਨਹੀਂ ਪਤਾ ਸਾਨੂੰ ਬਿਮਾਰ ਕਰਨ ਵਾਸਤੇ ਹੀ ਮੱਛਰ ਪੈਦਾ ਕੀਤਾ ਕੋਈ ਹੋਰ ਵੀ ਗੱਲ ਹੋਣੀ ਉਹਦੀ ਲੋੜ ਹੋਣੀ ਸਾਨੂੰ ਸਾਨੂੰ ਨਹੀਂ ਉਹਨਾਂ ਰੋੜੇ ਨੂੰ ਸਮਝ ਨਹੀਂ ਪਤਾ ਕੀ ਕੀ ਦਾ ਹਿੱਸਾ ਹੈ ਹੋਰ ਸਾਡੇ ਕੋਲ ਜੰਗਵਾਰਨ ਵਾਸਤੇ ਬਿਮਾਰਾਂ ਵਾਸਤੇ ਨਹੀਂ ਮਛਰ ਪੈਦਾ ਕੀਤਾ ਉਹਦੇ ਬੁਰਾ ਫੇਰਾ ਪੰਪੀ ਨਹੀਂ ਆਉਂਦੀ ਸਭ ਰਮ ਗੱਲੇ ਵੀ ਬਣਾਇਆਇਆ ਏਥੇ ਸੰਘੇ ਵੀ ਬਣਾਇਆਇਆ ਏਥੇ ਸਾਪੇ ਵੀ ਬਣਾਇਆਇਆ ਏਥੇ ਉਹਦੇ ਨੰਗੇ ਦਾਦੂ ਮਰ ਵੀ ਜਾਂਦਾ ਪਰ ਉਹਦੀ ਜਿਹੜੀ ਲੋੜ ਹੈ ਉਹਨੂੰ ਕੋਈ ਨਹੀਂ ਲੋੜ ਸੰਤੁਲਨ नहीं ਸੀ ਰਹਿ ਸਕਦਾ ਨਾ ਚੀਜ਼ਾਂ ਦੇ ਬਿਨਾਂ ਆਟੋਮੈਟਿਕ ਸੁਸਤ ਮਾਸਾ ਰਹਿ ਚੁ ਮਾਇਆ ਉਹਨੇ ਆਟੋਮੈਟਿਕ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਹੋ ਗਏ ਲੋਡ ਸੀ यह ਆ ਜੋ ਅਸੀਂ ਬਹੁਤ ਪਿੱਛੇ ਆਪਣਾ ਗਿਆਨ ਚ ਇਹ ਹੈ ਕਰਨ ਪਰ ਉਹਨਾਂ ਦੇ ਅਧਿ ਦੇਕ ਚੋ ਪੁਰਾਣਾ ਪਹਿਨੀ ਬੜੀ ਇਜੀ ਮੱਚਦਾ ਆਪਾਂ ਨੂੰ ਨੁਕਸਾਨ ਦਾ ਤਾਂ ਪਤਾ ਹੀ ਆ ਨੁਕਸਾਨ ਦਾ ਤਾਂ ਪਤਾ ਲੱਗੇ ਗਿਆ ਇਦਰੇ ਪਦੇ ਗਿਓ ਕਿ ਲੋੜ ਸੀ ਬੁਗਵਾ ਬੁਝ ਲੋ ਹਲੇ ਉਹ ਬੁਝਿਆ ਜਾਊਗਾ ਖਬਰ ਹੈ ਜੋ ਕੁਝ ਬੜੀ ਚੀਜ਼ ਅਗੜਿਆ ਹੋਵੇ ਇਹ ਕਹਿੰਦੇ ਸੀ ਖੋਜ ਕਰਦੇ ਦੂਰ ਤੱਕ ਛੜ ਗਏ ਅਰੋਧਿ ਰਾਵਣ ਅੰਨੇ ਉਹ ਰਾਇ ਨੇ ਇੱਕ ਤਰਫੇ ਫੈਸਲੇ ਆਰਾਮ ਤੋਂ ਜ਼ਿਆਦਾ ਕੀਤਾ ਸਾਰੋਂ ਬਿਮਾਰੀਆਂ ਤੇ ਬਚਰਵਾ ਤੇ ਦਵਾਈ ਬਣਾਉਣੀ ਪਈ ਉਸ ਸਪਰੇ ਕਾ ਨਹੀਂ ਪਈ ਸਬਤਿਆਂ ਦੀਆਂ ਬਿਮਾਰੀਆਂ ਕਰਕੇ ਫਸਲਾਂ ਦੀਆਂ ਬਿਮਾਰੀਆਂ ਕਰਕੇ ਦਵਾਈਆਂ ਬਣਾਉਣੀਆਂ ਪਈਆਂ ਬਣਾ ਲੀਆਂ ਅਸੀਂ ਆਪਣੀ ਅਕਲ ਨਾਲ ਬਚਾਉਣ ਵਾਸਤੇ ਪੈਦਾ ਉਹਦਾ ਨੁਕਸਾਨ ਝਟਪਟ ਪਤਾ ਲੱਗਿਆ ਥੋੜਾ ਜਿਹਾ ਫਜਾ ਨਾਲ ਘਾਤ ਨੂੰਆਂ ਸਾਲਾਂ ਤੋਂ ਐਵੇਂ ਚੱਲਿਆ ਹੁੰਦਾ ਸੀ। ਉਹ ਜਿਹੜਾ ਰਸਾ ਅਪਣਾਇਆ ਸਾਨੂੰ 50 ਸਾਲ ਦੇ ਕੋ ਤਾਂ ਰਜੇ ਰਸਾ। ਇਹ ਗੱਲ ਵਾਹਂ ਭ੍ਰਮ ਗਿਆਨੀ ਸਦਾ ਸਮਦਰਸੀ। ਪਰ ਗਿਆਨੀ ਸਦਾ ਸਬਦ ਅਸੀ। ਪਰ ਗਿਆਨੀ ਜਿਹੜਾ ਸਦਾਈ ਸਬਦ ਅਸੀ। ਉਹ ਉਸੇ ਦ੍ਰਿਸ਼ਟੀ ਵਿੱਚ ਕਾਣ ਨਹੀਂ ਹੈ। ਇਹ ਨੂੰ ਬੁਰਾ ਸਮਝੇ ਕਿਸ ਨੂੰ ਉੱਚਾ ਕਿਸ ਕਰ ਚਾਹੇ ਰਾਜਾ ਹੋਵੇ ਚਾਹੇ ਰੰਕ ਹੋਵੇ ਉਹਦੇ ਵਾਸਤੇ ਦੁਨੀਆਂ ਇੱਕੋ ਜਿਹੀ ਹੈ ਉਹਦੇ ਵਾਸਤੇ ਥੋੜੀ ਜਿਹੀ ਜਿਸਕਾ ਦੀ ਹੈ ਪ੍ਰੇਮ ਦੀ ਜਦ ਜੋ ਉਹਦੇ ਉੱਤੇ ਪ੍ਰੇਮ ਸੱਚ ਕਰਦਾ ਉਹਦੇ ਹੈ ਥੋੜਾ ਜਿਹਾ ਫਸ ਜੇ ਸੱਚ ਨੂੰ ਕੋਈ ਜ਼ਿਆਦਾ ਪ੍ਰੇਮ ਕਰਦਾ ਤਾਂ ਉਹਨੂੰ ਗਿਆਨੀ ਦੇ ਦਿਲੋਂ ਦੀ ਜ਼ਿਆਦਾ ਚੱਕੋ ਪਰਮੇਸ਼ਰ ਦੇ ਜ਼ਿਆਦਾ ਸਫਾਇਰ ਉਹ ਗਾਂ ਹਦੀ ਹੋਤੀ ਜਦ ਹੈ ਇਹ ਨੂੰ ਗੱਲ ਨਹੀਂ ਪੈਂਦੀ ਹੈ ਨਹੀਂ ਇਹਦਾ ਫੇਸ ਬਹਾਖਰਾ ਹੁੰਦਾ ਐਸਾ ਬੂਰਖੋ ਨਹੀਂ ਆ ਬਰੰਗਿਆਦੀ ਐਨ ਇਸ ਆਫਟਰ ਸੀ ਵੀ ਉਹ ਨੂੰ ਕੋਈ ਸਮਝੂ ਦਾ ਨਾ ਨਾ ਉਹ ਹਫਤਾ ਸੀ ਹੈ ਜਦ ਇਹ ਖਮੜਾ ਛੱਡੋ ਪੜੇ ਮੈਨੂੰ ਗਿਆਨ ਦੀ ਹੈ ਆਪਣਾ ਹੀ ਹੈ ਵੀ ਬਸ ਐਂ ਕਹਿ ਕੇ ਆ ਡਿਊਟੀਲਾਈਜ਼ ਕਰ ਦਦਾ ਹੈ ਗੁੱਸੇ ਨੂੰ ਆਪਣੇ ਨੂੰ ਕੁਇ ਤਾਂ ਸਿਰ ਜਿਹੜਾ ਆਪਾਂ ਦੇਖ ਰਿਆਂ ਉਹਦੇ ਚ ਗੁੱਸਾ ਉਹ ਦੇਰਵ ਕਰ ਦੇ ਦੀ ਨਾ ਸਾਡੀ ਉਹ ਨਾ ਇਹ ਆਪਣਾ ਇਹਦੀ ਗਲਤੀ ਵੀ है ਹੈ ਦੀ ਆ ਆਪਣਾ ਹੈ ਦੀ ਇਹਦੀ ਥੋੜੀ ਗਲਤੀ ਵੀ ਜ਼ਿਆਦਾ ਉਹ ਜੇ ਗੱਲ ਹੈ ਸਮਝਦ ਸਿ ਸਮਝਦ ਸੀ ਇੱਕੋ ਜਿਹਾ ਉਹਦੇ ਲੈਵਲ ਤੇ ਆ ਕੇ ਕਿ ਕੋਈ ਜਸੂਲ ਹੋ ਜਾ। ਘੱਟ ਵੱਧ ਬੋਏ ਨਹੀਂ ਹੈਗੇ। ਕਿ ਕੋਈ ਹੈ। ਆਪਣਾ ਪਰਾਇਆ ਹੈ ਉਹ ਜੀ। ਉਹ ਵੀ ਮੋਹ ਨਾਲੇ ਹੁੰਦਾ ਆਪਣਾ ਪਰਾਇਆ। ਇਸ ਕਰਕੇ ਇਸ ਐਸੇ ਦਿਲ ਤੋਂ ਸਫਤ ਸੀ ਔਰ ਐ ਨਹੀਂ ਹੈਗਾ ਵੀ ਜਿਹੜਾ ਆਪਣਾ ਸਾਧਾਤਾ ਔਰ ਸਾਧੂ ਨੂੰ ਕੋਈ ਜਸ ਸਮਝਦਾ। ਐ ਤਾਂ ਗੁਰਬਾਣੀ ਸਮਝਿਆ ਨਹੀਂ। ਇਦੋਂ ਉਫੜੀ ਉੜ ਚੁਈ ਸਾ ਸਾਖਤ ਮਰ ਐ ਸਾਖਤ ਸਭ ਜੀਵ ਐ ਉਹ ਸਮਝ ਦੱਸਿਓ ਯਾ ਉਹਨਾਂ ਦਾ ਗੱਲ ਰਸੀਆ ਵੀ ਭਾਈ ਗਾਹਾਂ ਮੈਂ ਦੱਸ ਦੇਣਾ ਕੀ ਹੋ ਰਿਹਾ ਸਾਖਤ ਜਿੰਨੇ ਨੇ ਸਾਰੇ ਮਰ ਕੇ ਜਾਂਦੇ ਨੇ ਤੁੰ ਸੱਤ ਜਿੰਦੇ ਰਹਿਣ ਨੇ ਤੇ ਵੀ ਜਿੰਦੇ ਬਾਝ ਵੀ ਜਾਂਦੇ ਫਿਰ ਛੱਡਣ ਦੇ ਬਾਝ ਐ ਜੇ ਹੋਣੇ ਹੋਈ ਹੀ ਨਾ ਆ ਗੱਲ ਦੇ ਰਸੀਓ ਉਹਨਾਂ ਨੇ कोई श्राप थोड़ी देता है किसी फिर कई बार बुरा भला भी किया होया वो तां क्या होया अपने समझ गए भाई तूसी उल्टे पासे क्यों जाते साहब काले कपड़े धोए होय ना से वो कहता काले कपड़े हैं काले कपड़े धो के चिट्टियो जी वो नो ए थोड़ी कह तू काले कपड़े हो रहा है उन्होंने कहा भाई ਜੇ ਜੇ ਪਿਆਰ ਦਾ ਨਹੀਂ ਮੰਨਿਆ ਹੁਣ ਤੁਹਾਡੀ ਇਹਦੇ ਨਾਲ ਆਕੜ ਕੇ ਬੋਲੀਏ ਸ਼ਾਇਦ ਉਦਾਂ ਹੀ ਮੰਨ ਲਵੇ ਕਿ ਇਹ ਗਲਤੀ ਦਾ ਇਹ ਅਹਿਸਾਸ ਕਰਾਇਆ ਵੀ ਤੈਨੂੰ ਸੀ ਘਟਿਆ ਸਮਝਦੇ ਘਟਿਆ ਗੱਲ ਐ ਤੇਰੀ ਘਟਿਆ ਸੋਚ ਐ ਤੇਰੀ ਆਹੀ ਜਰਾ ਬੀ ਸੋਚ ਘਟਿਆ ਹੋਰ ਤਾਂ ਕੁਝ ਨਹੀਂ ਆਇਆ ਇਹਨੂੰ ਉਹਨਾਂ ਵਰਤਮਾਨ ਦਾ ਕੋਈ ਹੋਰ ਮੰਨਣ ਆ ਜਿਹੜਾ ਹੈ ਉਹ ਫਿਰ ਵੀ ਸੰਤਰਸੀ ਹੋਇਆ ਜੇ ਬੋਲਦਾ ਉਹ ਬੁਰੇ ਦਾ ਭਲਾ ਕਰੇ ਉਹ ਸੰਤਲ ਤੇ ਜਾਊਗਾ ਲੈ ਭੰਟ ਬ੍ਰह्म ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਹਾਂ ਬ੍ਰह्म ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਅਮਰਤ ਵਰਸੀ ਦਰਸ਼ ਉਹ ਚਾਹੁੰਦਾ ਕਿ ਸਭ ਦਾ ਸਾਰੇ ਬ੍ਰਹਮ ਗਿਆਨੀ ਬਣ ਜੇ ਹੁਣ ਉਹ ਕੀ ਕਰਦੀ ਹੈ ਉਹਦਾ ਚਾਹੁੰਦਾ ਹੀ ਆ ਮੁਰਮਾਨ ਚਾਹਦਾ ਹਰੇਕ ਸਾਰੇ ਮੁਰਮਾਨ ਬਣ ਜਾ। ਜਿਸ ਤੂੰ ਚਾਹਦਾ ਖਾ ਲੈ ਤੂੰ ਬਖਿਆ। ਸ਼ਰਾਬੀ ਜਾਂ ਨਾ ਵੀ ਸਾਰੇ ਸ਼ਰਾਬੀ। ਜਿਸ ਨੂੰ ਮੈਨਾਂ ਮਾਲਾ ਲਾਵੇ ਲਾਵੇ ਤੂੰ ਡਾ ਲੈ। ਜੈ ਦਾ ਕੋਈ ਹੈਗਾ ਹੋਈ ਇਹ ਚਾਹਦਾ ਸਾਰੇ ਮਨ। ਹਮਲੇ ਕਰਦੇ ਸਾਰੇ ਹਮਲੇ ਗੁੱਜਨ। ਪਰ ਉਹ ਮੈਂ ਅਧਿਕਾਰ ਦਾ ਸਾਰੇ ਗੁੱਜਨ ਅਧਿਕਾਰ। ਇਹ ਤਾਂ ਸੁਭਾਏ ਸਭ ਚੱਲਿਆ ਹੁੰਦਾ। ਇਹ ਤਾਂ ਸਭ ਹਾਲੇ ਵਿੱਚ ਹੈ ਸਾਰਿਆਂ ਲਈ ਹੈ। ਇਹਨੂੰ ਕੋਈ ਵਾੜਾ ਵੀ ਸਮਝਦਾ। ਉਦੀ ਦ੍ਰਿਸ਼ਟੀ ਵਿੱਚ ਅਮਰ ਬਰਸਾ ਵੀ ਸਾਰੇ ਜਬਨ ਮਨ ਤੋਂ ਮੁਕਤ ਹੋ ਕੇ ਅਮਰ ਹੋ ਜਾਣ ਆਹ ਹਰ ਤਬਰਸੀ ਇਹ ਸਾਰੇ ਅਮਰ ਹੋ ਜਾਣੇ ਹੈ ਐਸੇ ਅਮਰ ਬਹੁਤ ਬਾਨੀ ਦੀ ਵਰਖਾ ਕਰਦਾ ਹੋ ਕੇ ਸਾਰੇ ਉਹ ਅਮਰ ਹੋ ਜਾਣ ਤੋ ਪਰਕੀਬ ਹੈ ਹੋਮ ਜੋ ਉਹਦੀ ਐਜੀ ਐਜੀ ਨਗਾਰੇ ਇਤਨ ਉਹਦੀ ਖਾਲੇ ਬੈ ਉਹਦਾ ਧਿਆਨ ਇਸ ਗੱਲ 'ਤੇ ਰਹਿੰਦਾ ਜਿੰਨੇ ਲੋਕ ਨੇ ਸਾਰੇ ਮਤਲਬ ਅਵਰ ਹੋ ਗਏ ਉਹਦੇ ਵਿੱਚ ਜਿਹੜੇ ਘੜੇ ਕਾਬੂ ਲੈ ਕਰਨ ਵਾਲੇ ਨੇ ਵਿਰੋਧ ਕਰ ਲਾ ਨੇ ਉਹਨਾਂ ਨੂੰ ਕਦੇ ਕਦੇ ਉਪਰ ਸਹਿਮੀਦ ਹੁੰਦੇ ਉਹ ਤਾਂ ਸਦਾ ਵੀ ਕਹਿ ਦਿੰਦੇ ਕਹਾਂ ਜੋਗ ਵੀ ਉੱਥੇ ਆ ਸਫਾਈ ਤਾਂ ਨਹੀਂ ਉਹਦਾ ਬਸਾਰ ਹੈ ਤੁਸੀਂ ਵਿੱਚ ਪਰੇ ਲਿ ਰਹੇ ਆ ਉਹਨਾਂ ਨੂੰ ਇਹ ਬਚ ਨਾ ਜਾਣ ਤੁਸੀਂ ਕੀ ਕਰਦੇ ਆ ਫਿਰਾਂ ਵੱਜਿਆ ਤੇ ਸਿਕਰਾ ਇਨਾ ਪੜਿਆ ਨਾ ਭਾਈ ਲੱਗੀ ਜਾਤ ਪਾਣ ਅੱਗੇ ਰਹੀਂ ਤੂੰ ਤੁਸੀਂ ਇਹ ਕੰਮ ਇੱਕ ਪਾਸੇ ਇਹ ਕੰਮ ਹੋ ਰਿਹਾ ਉਹ ਸੋਚਣਾ ਆਪ ਸिखਾ ਦੇ ਪਬਲਿਕ ਨਹੀਂ ਪਬਲਿਕ ਨੂੰ ਕਹ ਲੋ ਸਾਰੀ ਨੇ ਸੋਚਣਾ ਕਿ ਕਿੱਥੋਂ ਜਾਣਾਂ ਕੀ ਇਹ ਗੱਲ ਗੁਰਮੀਰ ਦੀ ਨਹੀਂ ਗੁਰ। ਜਿਹੜਾ ਤੁਹਾਨੂੰ ਲਿਵਾਉਣ ਵਾਲਾ ਉਹਦੀ ਗੱਲ। ਜਾਣਬੁੱਝ ਕੇ ਡੁੱਬਣਾ ਕੋਈ ਨਹੀਂ ਚਾਹਦਾ। ਜਾਣਬੁੱਝ ਕੇ ਡੁੱਬਣਾ ਕੋਈ ਨਹੀਂ ਚਾਹਦਾ। ਇਹ ਤਾਂ ਦਸਾਂ ਦੁਹਾਣੇ ਆ। ਉਹ ਆਪਣੀ ਗੱਲ ਦੱਸਦੇ ਨੇ ਗੁਰਬਾਣੀ ਆਪਣੀ ਗੱਲ ਦੱਸਦੀ ਹੈ। ਪਰ ਆਪਣੀ ਨਹੀਂ ਦੱਸਦੀ ਜਿਹਨੇ ਇੱਥੇ ਸਾਨੂੰ ਭੇਜਿਆ ਜਿਹੜੇ ਕੰਮ ਵਾਸਤੇ ਭੇਜਿਆ ਜਿਹੜੇ ਕੰਮ ਵਾਸਤੇ ਆਏ ਆ ਇੰਨਾ ਸਾਰਾ ਬਣਿਆ ਬਣਾਇਆ ਜਿਹੜੇ ਪ੍ਰੋਫੈਸ਼ਨ ਦੇ ਭੇਜ ਉਹਦਾ ਮੈਸੇਜ ਹੈ ਤੁਸੀਂ ਕੀ ਕਰਨਾ ਹੈ ਉਹੀ ਕਰਨਾ ਤੋਂ ਬਿਚੇ ਤਾਂ ਦਾ ਜੀਵਨ ਕਰਨਾ ਕੀਮਤੀ ਹੈ ਕੀ ਤੁਸੀਂ ਕਰਨਾ ਚਾਹੁੰਦੇ ਨਹੀਂ ਚਾਹੁੰਦੇ ਜਿਹੜੇ 70% ਗੱਲਾਂ ਸੀ ਮੰਨਦੇ ਹੀ ਜੋ ਜੀਵਨ ਕੀਮਤੀ ਹੈ ਥੋੜੀ ਬਦਲੇ ਜਾਏ ਰਹੀ ਰਾਜਾ ਸਾਰੀ ਬੰਦੇ 30% ਗੱਲਾਂ ਆ ਜਿਹੜੀਆਂ ਉਤਲੀਆਂ ਨੇ ਜਿਹੜੀਆਂ ਨਹੀਂ ਬੋਲਦੇ ਤੇ ਤੀਕ ਮੰਨ ਲੋ ਸਾਰੇ ਕੋਈ ਗੱਲ ਕੀ ਫਰਕ ਪੈਂਦਾ ਫੱਕੀ ਮੋਟੀਆਂ ਅਲੱਗ ਅਸੀਂ ਹਾਂਦਾ ਹੀ ਆ ਸਾਜੇ ਹਾਂ ਗਿਆਨੀ ਬੰਧਨ ਤੇ ਮੁਕਤਾ ਪਰ ਉਹ ਬੰਧਨ ਤੇ ਮੁਕਤਾ ਉਹ ਆ ਜਿਹੜੇ ਬੰਧਨ ਹੈ ਨਾ ਦੋ ਕਿਸਮ ਦੇ ਬੰਧਨ ਨੇ ਇੱਕ ਬੰਧਨ ਹੈ ਫਿਜ਼ੀਕਲ ਸਾਡੇ ਆਇਰ ਜਦੋਂ ਇਹਨਾਂ ਸਵੇਰ ਉੱਠਣਾ ਇਹ ਬਦਨ ਨੇ ਇਹ ਉਹ ਬਦਨ ਨਹੀਂ ਹੈ ਗਾ ਵੀ ਇਹਨਾਂ ਦੇ ਦਾਸਾ ਵੀ ਇਹਨੇ ਬਿਓ ਕਰਦੀ ਹੈ ਉਹ ਬਦਨ ਹੈ ਕਾਹਨ ਲੱਗਵੀਂ ਨਾਮ ਜਪਣ ਦੀ ਕਿਹੜਾ ਟਾਈਮ ਹੁੰਦਾ ਕੁਰਬਾਨੀ ਇਹਨਾਂ ਬਦਨ ਤੋੜਦਾ ਨਾ ਉਹ ਪਰਵਾਨੇ ਹੱਦ ਤੱਕ ਉਹ ਖਸਰਾ ਦਿਆ ਬਦਨ ਕੋਈ ਨਹੀਂ ਹੈ ਸਾ ਸਾ ਸਾ ਸਾ ਨੰਗਰੋ ਗੋਬਿੰਦ ਕਹਿੰਦਾ ਹੱਥ ਪਾਰ ਕਰ ਕੰਮ ਸਭ ਚੀਜ਼ਾਂ ਅੰਨਾਂ ਰੋ ਜਿਹਾਂ ਲੋਕਾਂ ਨੇ ਬਦਨ ਪਾਇਆ ਨੇ ਉਸ ਰੱਤੀ ਸੀ ਛੁੱਟ ਦਿੱਤੀ ਉਹਨਾਂ ਤੋਂ ਪਰ ਉਹ ਜਦੋਂ ਇਹ ਬਦਨ ਉਹਨਾਂ ਤੋਂ ਹੁੰਦਾ ਵੋਕਸ ਕਰਦਾ ਸਾਰੇ ਉਹਨਾਂ ਭਾਈ ਜਦ ਵੀ ਮਰਜੀ ਜਦੋਂ ਟਾਈਮ ਮਿਲੇ ਉਹ ਜੂੜੀ ਨਹੀਂ ਅਸੇ ਰੀ ਅੱਜ ਮੇਰੇ ਝੂਟੀ ਜਦੋਂ ਮੇਰੇ ਜਾਣ ਆਹ ਮਰੇ ਜਾ ਕਰੋ ਪਰ ਕਰੋ ਵਿਚਾਰ ਜਿੱਥੇ ਜਾ ਕੇ ਦੱਸਦੇ ਆਂ ਕਰੋ ਤੇ ਮਾਨਸਿਕਿਆ ਹੋਇਆ ਭਜੇ ਜਾਂਦੇ ਪਾਠ ਕਰੀ ਜਾਂਦੇ ਨਾ ਪਤਾ ਕੀ ਪੜ ਗਏ ਨਾ ਪਤਾ ਪਰ ਕਰਨਾ ਜ਼ਰੂਰ ਹੈ ਕਿ ਤੁਮਾਸ਼ਾ ਨਹੀਂ ਕਰਵਾਉਣਾ ਉਹ ਉਹ ਤੋੜਿਆ ਉਹ ਬਣ ਉਹੀ ਕੀਤਾ ਪੜ ਗੱਡੀ ਰੱਦੀਏ ਮਤਲਬ ਜੀ ਪਹਿਲਾਂ ਉਹ ਪੜ ਗੱਡੀ ਰੱਦੀ ਆਲੀ ਗੱਲ ਕਹਿ ਕੇ ਉਹ ਦੁਬਾਰਾ ਫੇਰ ਨਹੀਂ ਸਾਡੇ ਨਾਲ ਬਾਤ ਕਰਦਾ ਵਾਰਨ ਵਾਲੀ ਗੱਲ ਨੇ ਤੇਰੇ ਵਾਲੀ ਗੱਲ ਹਾਂਜੀ ਬ੍ਰह्म ਗਿਆਨੀ ਕੀ ਨਿਰਮਲ ਜੁਗਤਾ ਬ੍ਰह्म ਗਿਆਨੀ ਕੀ ਨਿਰਮਲ ਜੁਗਤਾ ਉਹਦੀ ਜਿਹੜੀ ਜੁਗਤੀ ਹੁੰਦੀ ਹੈ ਜੀ ਤਰਕੀਬ ਹੁੰਦੀ ਹੈ ਮੁਕਤੀ ਦੀ ਤਰਕੀਬ ਹੈ ਜਿਹੜੀ ਆ ਜੀ ਛੁੱਟਣ ਦੀ ਜਿਹੜੀ ਤਰਕੀਬ ਹੈ ਬਈ ਗੁਰੂ ਹਾਂ ਕੋਠੇ ਗੱਲ ਕਰੇ ਹਾਂ ਤੇ ਜਿਹੜਾ ਧੀਚ ਹੈ ਉਹਨੂੰ ਮੰਤਰ ਪੁੱਠਾ ਦੇਈਦਾ ਸਿੱਧਾ ਹੀ ਦੇਈਦਾ ਉਹ ਇਹ ਜੀਤੇਸ ਹੱਤ ਸਤਾ ਦੇ ਸ਼ਿਆਨ ਉਹ ਆਪਣਾ ਆਇਆ ਸੀ ਨਾ ਆ ਬਲਬੀਟ ਸਾਲ ਵਿੱਚ ਇਤਨੇ ਸਤ੍ਰਿਸ਼ੀ ਲੁੱਟਣ ਲੱਗਿਆ ਜਦੋਂ ਉਹ ਕਹਿੰਦੇ ਨੇ ਕਿ ਯਾ ਘਰ ਪੁੱਛਿਆ ਕਿ ਚਰਨ ਉਹ ਜਿਹੜਾ ਤੁਪਾ ਆਪ ਦਾ ਹਿੱਸਾ ਕੋਉਣ ਲਊਗਾ ਉਹ ਕਹਾਂ ਕੇ ਆਇਆ ਤੇਰੇ ਕੋਲ ਨਹੀਂ ਲੱਗੇ ਤੁਹਾਨੂੰ ਤੇ ਤਾਂ ਉਹ ਉਹਦੇ ਵਿੱਚੋਂ ਉਹ ਬ੍ਰਾਮ ਕੀਤਾ ਤਾਂ ਬਾਂਧੋ ਇਹ ਗੱਲ ਤੇ ਉਹ ਕਹਿੰਿਆ ਉਹ ਰਾਮ ਤਾਂ ਅਪੁਸ਼ਤ ਜੀ ਦਾ ਤਾਂ ਫਰਾਨ ਮਰਾਨ ਮਰਨ ਗਈ ਜੋ ਮਰਾੰਦੋ ਚੋtheta ਆਵਾਜ਼ੇ ਬਣ ਗਈ ਉਹ ਗੱਲ ਬਣਦੀ ਹੈ ਸਾਨੂੰ ਬਰਲਾਕ ਤੇ ਦੀ ਤੁਹ ਨੂੰ ਨਹੀਂ ਦੇ ਸਕਦੇ ਉਹ ਜਿਹੜੀ ਸੀ ਨਾ ਸਿਵਰਤੀ ਦੀ ਗੱਲ ਉਹਨੂੰ ਉੱਥੇ ਜਸਟੀਫਾਈ ਕਰਤਾ ਉਸ ਵੇਲੇ ਉਸ ਵੇਲੇ ਦੇ ਪਰਪਰਾ ਚੱਲ ਜਾਂਦੇ ਝੂਠੀ ਕਥਾ ਲਿਖੀ ਉਹ ਜਿਹੜੀ ਜੈਸੀ ਜੋ ਕੀਤਾ ਸ਼ੁਰੂ ਉਹ ਜਾਇਜ਼ ਹੈ ਪਹਿਲਾਂ ਸਹੀ ਹੈ ਉਹਨਾਂ ਮਤਲਬ ਨਹੀਂ ਲੈਣਾ ਸੀ RAM ਦਾ ਨਾਮ ਦਿੱਤਾ ਜਾ ਸਕਦਾ ਉਹਨੂੰ ਮਰ ਮਰਾਂ ਜਦੋਂ RAM ਦੇ ਨੇ ਅੱਗੇ ਮੁੜੀ ਉਹ ਕਹਾ ਇਹ ਵਰਪਜਾਤੀ ਦਾ ਮੰਤਰ ਨਹੀਂ ਹੰਤਾ ਸ੍ਰੀ ਕੇ ਦਾ ਜਿਹੜੋਂ ਗਿਆਨ ਦੀ ਨਿਰਮੋ ਸਿੱਧੀ ਕਰਦਾ ਆ ਮੰਤਰ ਅਸਦਾ ਉਹ ਪੁੱਠੀ ਗੱਲ ਨਹੀਂ ਕਰਦਾ ਵੀ ਪੁੱਠੀ ਤੈਨੂੰ ਮੰਨਦਾ ਫਿਰਦਾ ਸਿੱਧਾ ਹੋ ਜਾ। ਰਮ ਗਿਆਨੀ ਦਾ ਭੋਜਨ ਗਿਆ। ਕਿਉਂਕਿ ਬ੍ਰਿਗਿਆਨੀ ਦਾ ਭੋਜਨ ਗਿਆਨ ਹੈ। ਹੋ ਰਾਮ ਰਾਮ ਇਹੋ ਜਿਹਾ ਭੋਜਨ ਤਾਂ ਸੁਖੀ ਮਰਦਾ। ਨਾ ਬਰਾ ਬਰਾ ਗਾਇਦਾ ਕੋਈ ਭੋਜਨ ਮਰਦਾ ਨਾ ਰਾਮ ਰਾਮ ਕਹੇ ਕੋਈ ਜਨਮ ਤਾਂ। ਪਰ ਬ੍ਰਿਗਿਆਨੀ ਦਾ ਜਿਹੜਾ ਭੋਜਨ ਆਉਂਦਾ। ज्ञान का भोजन आत्मा का भोजन है ब्रह्म का भोजन असल ब्रह्म है जो ज्ञान हासिल कर रहे है हुण जेड़ा ब्रह्म पूर्ण ब्रह्म की तरफु जा रहा है हुण ये ज्ञान स्वरूप ज्ञान लेके ज्ञान लेके ब्रह्म पूर्ण ब्रह्म की तरफु जा रहा है जब ये ज्ञान पूरा हो जाना है पूर्ण ब्रह्म मर्ज जाना है ये ज्ञान का भोजन को लेवा बना लिया ਸਰੀਰ ਦਾ ਭੋਜਨ ਵੱਖਰਾ ਕਰਦਾ ਹੁੰਦਾ ਭੋਜਨ ਵੱਖਰਾ ਹੋ ਗਿਆ ਸਰੀਰ ਨੂੰ ਭੋਜਨ ਮਿਲਦੇ ਨਾ ਵੇ ਕੋਈ ਰੌਲਾ ਨਹੀਂ ਸਰੀਰ ਬਾਹਲਾ ਮਨ ਦਾ ਭੋਜਨ ਹਰ ਵਕਤ ਚਾਹੀਦਾ ਰੁਕਣਾ ਸਾਹ ਸਾਹ ਕਰਾਹਣਾ ਵਿਸਰੈ ਇਹਦਾ ਸਾਹ ਹੈ ਕਰਾਹਣਾ ਹਰ ਸਾਹ ਨਾਲ ਕਰਾਹਣਾ ਚਾਹੀਦਾ ਹਸਰ हर साल अगला हर साल अगला चाहिए हां सा एक साल भी वैरी फिट एक साल लेना भी ज्ञान तो बिना कांटे का सौदा हर साल और कुछ ना कुछ ज्ञान मिलना चाहिए तो सही बड़ी गल और नहीं साहब ऐसे चले गए ਉਹ ਚਲ ਕੇ ਆਮਾ ਵਸਾਈ ਪੜਿਆ ਹੂੰ ਗੁਰੰਗਨਾ ਦੇ ਸਾਹ ਤੇ ਰਾਸਾ ਵਿਸਰੇ ਥੀਰਾਂ ਵਿਸਰੇ ਹਾਂ ਨਾਮ ਆਪਣ ਮਨ ਦਾ ਗਿਆ ਹਦਾ ਗਿਆ ਹਾਂ ਨਾਮ ਨਾਮ ਮਨ ਮਨ ਜਿਵੇਂ ਜਾਂਦਾ ਸੀ ਨਾ ਬੱਚਾ ਜਾਂਦਾ लेवल लगी हुई थी लगातार मारोगे तो इस तरह जाती थी ना हर साण औरत ऐ जाना चाहिए था कॉल लेवल होती है द्वारा जब तो अपर आईडी लगी वो जबते कृष्णा लागिरा मुड़ के फेलिवनी लावणी जे हुन लेवल लगूगी तो अपर आईडी अवस्था होगी लड़की वो लेवल लगी इदे बीच ही ज्ञान मलना ਉਹ ਲੈਵ ਲੱਗੀ ਦੇ ਵਿੱਚ ਹੀ ਗਿਆਨ ਸਰੀਰ ਦਾ ਲਿਆ ਸੀ। ਜਿਆ ਸਰੀਰ ਜੁੜਿਆ ਉਹ ਲੈਵ ਦੇ ਵਿੱਚ ਜੁੜ ਗਿਆ। ਬਾਤ ਕੀ ਹੋ ਸਕਦਾ। ਉਹ ਜਿਵੇਂ ਲੱਗੀ ਤੇ ਬਾਦੀ ਇਹ ਗਿਆਨ ਜੋ ਹੈ ਸਰੀਰ ਤੇ ਬਾਹਰ ਤੋਂ ਮਨ ਸਰੀਰ ਤੋਂ ਬਾਹਰ ਕੇ ਰਹੀਦਾ ਜਿਉਂਦੇ ਬੋਕਦਾ ਹਾਂ ਸੀਰ ਤੋਂ ਜਿਉਂਦੇ ਹੀ ਬਾਹ ਦੇਣਾ ਉਹ ਪਰ ਜਿਉਂਦੇ ਪੜਤਾ ਗਿਆ ਅਕਲੇ ਚ ਚਕਰ ਵਿਊ ਚ ਚਾਹ ਨਕਰਨ ਦਾ ਆਇਆ ਮਾਂ ਸੌਂਗੀ ਮਤ ਸੌਂਗੀ ਕ੍ਰਿਸ਼ਨਾਂ ਲਾਗੀ ਹੁਣ ਸੋਈ ਸੋਈ ਜਾਗੀ ਐ ਜਾਗੀ ਨੂੰ ਕਥਾ ਸੁਣਾਉਣੀ ਹੈ ਹੁਣ ਮੈਂ ਦਿਸਕਰਨ ਦੀ ਕਥਾ ਉਹ ਸੁਣਾਉਣੀ ਹੈ ਦਿਸਕਰਨ ਇਹ ਹਕੀਕਤ ਹੈ ਬ੍ਰਹਮ ਗਿਆਨੀ ਕਾ ਭੋਗ ਗਿਆ ਜਿਹਨੂੰ ਕਹਿੰਦੇ ਨੇ ਹਰ ਉਹ ਹਕੀਕਤ ਹੈ Shivdi ਕਥਾ ਹੈ ਇਹ ਵਿਕਰਮ ਦੀ ਬਾਹਰ ਕਥਾ ਹੈ ਹੁਣ ਉਸ ਪਦਾਰਥ ਦੀ ਕਥਾ ਕਹਿੰਦੇ ਸ਼ਬਦ ਰੂਪ ਜੇ ਪਾਦਨ ਕਰਕੇ ਜਿਵੇਂ ਆਣ ਇਹਦੇ ਵਿੱਚ ਹੀ ਆਣਾ ਹੁਣ ਪੂਰਨ ਬ੍ਰਹਮਤਾ ਹੈ ਪੂਰਨ ਬ੍ਰਹਮ ਆ ਲੱਗੀ ਹੋਈ ਹੈ ਇਹਦੇ ਮੇਰੇ ਲੱਗੀਆਂ ਪੂਰਨ ਬ੍ਰਹਮਾ ਪੂਰਨ ਬ੍ਰਹਮ ਦੇ ਬਾਹਰ ਨਾ 파ਰ ਹੋਣਾ। ਤੇਰਾ ਸਰੀਰ ਦੀ ਲੋੜ ਨਹੀਂ। ਪੂਰਨ ਬ੍ਰਹਮ ਦਾ ਸਰੀਰ ਦੀ ਲੋੜ ਹੈ। ਸਰੀਰ ਨਹੀਂ ਹੁੰਦਾ। ਉਸ ਜੋ ਦਾ ਸਰੀਰ ਨਹੀਂ ਹੈ ਜੀ, ਆਈ ਸਰੀਰ ਹੋ ਜਾ। ਤੋਂ ਜਨੂ ਬਜ਼ਾਰ ਉਹ ਜਿਹੜਾ ਜਨ ਅਵਾਰਤ ਹੈ ਉਹ ਸਰੀਰ ਹੈ ਫਿਰ ਆਕਾਰ ਉ ਆਕਾਰ ਊਂ ਦਾ ਤਾਰ ਫਿਰ ਇਹਦੀ ਲੋੜ ਦੀ ਸੀ ਫਿਰ ਇਹਦੀ ਲੋੜ ਉਹਦਾ ਤਕ ਲੋੜ ਉਹਦਾ ਤਾਂ ਗੱਲ ਹੋਰ ਆਉਦੇ ਬਾਅਦ ਗੱਲ ਬ੍ਰह्म ਗਿਆਨੀ ਦਾ ਭੋਜਨ ਗਿਆਨ ज्ञानिक का भोजन क्या नानक ब्रह्मज्ञानी का ब्रह्मत्याग नानक ब्रह्मज्ञानी का ब्रह्म वृक्ष ज्ञानियों का क्या हमको थे अपने मूल व समझो मूल व नानक ब्रह्मज्ञानी का ब्रह्मत्याग अपने जे अपने जै? जै? ਸੋ ਆਏ ਆਦਮੀ ਤੋਂ ਰਵਾਲੂ ਕਹਤੀ ਜੀ ਇਹ ਸੇ ਕਰਕੇ ਨਹੀਂ ਛੱਡੇ ਹੁੰ ਜਾਂਦੇ ਹੋ ਕਿ ਆਤਮਾ ਧਿਆਨ ਨਹੀਂ ਹੈ ਤੇ ਖਾਲਾ ਗੱਲ ਹੀ ਹੋ ਗਿਆ ਬਸ ਰੁੜ ਗਿਆ ਮਾਇਆ ਨਾਲ ਸਿਵਾਜਾ ਹੋ ਗਿਆ ਮਾਇਆ ਦੇ ਗਿਆਨ ਨਾਲ ਸਿਵਾਜ ਹੋ ਗਿਆ ਇਹ ਤੇ ਜੀ ਲੱਗਿਆ ਰਾਜਗਰ ਦਾ ਜੀ ਕਿਰ ਲੱਗਿਆ ਹੋਊਗਾ ਕੋਈ ਨਹੀਂ ਨਾ ਕੋਈ ਬਹੁਤ ਸਾਰੇ ਉਹ ਸ਼ਹੀਦਾਇਤ ਹੈ ਜਾਂ ਕਿ ਪਰਦੇਸ ਹੋ ਗਿਆ ਕੋਈ ਨਾ ਉਹ ਤਾਂ ਹਰ ਵਕਤ ਇਹਨੂੰ ਦੇਖ ਰਹੀ ਜਾਂਦਾ ਉਹ ਤਾਂ ਦੂਰ ਹੈ ਉਹਦਾ ਤਾਂ ਕੋਈ ਦੂਰ ਨਹੀਂ ਹੈ ਉਹ ਤਾਂ ਸਾਰੇ ਬਗਲ ਤੇ ਬੈਠੇ ਨੇ ਕੋਈ ਦੂਰ ਤਾਂ ਨਹੀਂ ਇਹਦਾ ਅਸੀਂ ਦੂਰ ਅੜੇ ਆਪਣੇ ਆਪ ਨੂੰ ਮੰਨਦੇ ਹਾਂ। ਅਦੇ ਮੰਨਦਾ ਦੂਰ ਉਹ ਤਾਂ ਉਹ ਦੂਰ ਹਨ ਕੋਰੇੜੇ। ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਤੇ ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਤੇ ਆ। ਅਲੋਏ।